ਸ੍ਰੀ ਲੋਕ ਮਹੱਲਾ ਪੰਜਵਾਂ ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ ਸਤਗੁਰ ਦਿੱਤਾ ਹਰ ਨਾਮ ਅਮਰਤ ਚਖਿਆ ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ ਆਦ ਤੋਂ ਲੈ ਕੇ ਜਦੋਂ ਪੈਦਾ ਕੀਤਾ ਅੰਤ ਤੱਕ ਅਬਚਾਲੇ ਵਿਚਾਲੇ ਮਦ ਵਿਚਾਲੇ ਵੀ ਜਨ ਬਲੇ ਪਰਮੇਸ਼ਰ ਇਹਦਾ ਰક્ષਕ ਬਣ ਕੇ ਰਿਹਾ ਹੈ ਹੁਕਮ ਇਹਦੀ ਰੱਖਿਆ ਹੀ ਕਰਦਾ ਰਿਹਾ ਉਹ ਕੋਈ ਬੰਦਾ ਕਦੇ ਦਾ ਨੁਕਸਾਨ ਨਹੀਂ ਕੀਤਾ, ਬੁਰਾ ਨਹੀਂ ਕੀਤਾ, ਉਸ ਤੇ ਹੋਏ ਬੁਰਾ। ਹਾਂ ਜੇ ਕੋਈ ਬੁਰਾ ਹੋਇਆ ਇਹ ਤੇ ਆਪ ਤੇ ਹੀ ਹੋਇਆ ਪੁੱਠੇ ਕੰਮ ਨੇ ਇਹ ਆਪੇ। ਆਪਣਾ ਦਿੱਤਾ ਪਾਇਆ ਇਹ ਨੁਕਸਾਨ ਹੋਇਆ। ਜਿਹੜਾ ਤਾਂ ਹੋਇਆ ਉਲਟਾ ਹੋਤਾ ਹੋਇਆ ਇਹ ਤਾਂ ਹੋਇਆ ਕੋਈ ਨੁਕਸਾਨ ਹੋਤਾ ਹੋਇਆ ਇਹ ਤੇ ਜੋ ਕੁਝ ਹੋਇਆ ਚੰਗਾ ਉਹ ਹੋਇਆ ਹਮਨਰ ਚਿਤਰੀ ਗੱਲ ਹੈ। ਪਰਮੇਸ਼ਰ ਦੀਆਂ ਜੀਬ ਦੀ ਗੱਲ ਅੱਛਾ ਜੀ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਤਬੁੱਲ ਨੇ ਜਿਆ ਨਾਮ ਦਿੱਤਾ ਸਧੁਰ ਨੂੰ ਪਰਵੇਸ਼ਾ ਨੇ ਦਿੱਤਾ ਤਾਂ ਹੀ ਨੇ ਚੱਖਿਆ ਵੀ ਬਣਾਈਦਾ ਸੀ ਵੀ ਪੌਣ ਪਤਾਸੇ ਪਾ ਕੇ ਮਿੱਟੀ ਉਹਦਾ ਲੋਈ ਉੱਪਰ ਰੱਖ ਲਿਆ ਬਚਾ ਲਈ ਇਹ ਬੁਰਾਈ ਬਾਦੂ ਉਬਰਤ ਕਹਿਤਾ ਉਹਨੇ ਅੱਛਾ ਜੀ ਸਾਧ ਸੰਗ ਪਰ ਅੰਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਜੇ ਸਾਰੇ ਸਾਧੂਏ ਸਾਧੂ ਹੂਲ ਸਾਖਤ ਹੋ ਗਈ ਨਾ ਉੱਥੇ ਕੋਈ ਅੱਛਾ ਜੀ ਸਾਰੇ ਬੰਦਾ ਹੋਵੇ ਸਾਰੇ ਸਾਧੂ ਹੋਣ ਤੇਰਾ ਗੁਣ ਰਵੈ ਪੋਸੀਬਲ ਹੈ ਹੋਰ ਕੋਈ ਗੱਲ ਨਹੀਂ ਫਿਰ ਛੁੱਟਦੀ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਫਾਈਬਰ ਰੋਡ ਦੇ ਸਭ ਉੱਤੇ ਸਾਰੇ ਫਲੋਰਸ ਪਾਣਰ ਦੇ ਲੋਕ ਆਪਣੋ ਕੋ ਪੂਰੀਆਂ ਹੋ ਜਾਂਦੀਆਂ ਨੇ ਫਿਰ ਜੁਦੀ ਨਹੀਂ ਫਿਰਦਾ ਦੁਬਾਰਾ ਜੁਦੀ ਲੋੜ ਨਹੀਂ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਕਰਤੇ ਦੇ ਹੱਥ ਹੈ ਕਾਰਨ ਜੋ ਕਰੇ ਉਹ ਕਰਤੇ ਕਾਰਨ ਬਣੋਂਗੇ ਸਭ ਕੀਤਾ ਹੋਇਆ ਕਰਤੇ ਦਾ ਹੀ ਹੈ ਕਾਰਨ ਜੋ ਕਰੇ ਜੋ ਕਰਤਾ ਕਾਰਨ ਕਰਦਾ ਹੈ ਸਭ ਕੁਝ ਉਹਦੇ ਹੱਥ 'ਚ ਹੈ ਠੀਕ ਹੈ ਜੀ ਨਾਲੇ ਮੁਗਦੇ ਦਾ ਨੂੰ ਸਤਾਂ ਤੂਰ ਸਰ ਹੈ ਮੰਗਦਾ ਸੰਤਾਂ ਨੇ ਜਿਹਦੇ ਨਾਲ ਕਰ ਜਾਈਦਾ ਭਵ ਸਾਧ ਦਰ ਤਰ ਉਹ ਟੁੱڑی ਚਾਹੀਦੀ ਹੈ ਠੀਕ ਹੈ ਜੀ ਉਹ ਗਿਆਨ ਦੀ ਗੱਲ ਹੋ ਰਹੀ ਹੈ ਜੀ ਹਾਂ ਗਿਆਨ ਦੀ ਤੂਰ ਚਾਹੀਦੀ ਹੈ ਉਹ ਠੀਕ ਹੈ ਜਿਹਦੇ ਨਾਲ ਭਵ ਸਾਧ ਤਰ ਜਾਈਦਾ ਕਿ ਗੁਰਦਵਾਰਿਆਂ ਦੇ ਸਾਹਮਣੇ ਵੀ ਲੋਕ ਝਾੜੂ ਨਾਲ ਖਾਸਾ ਇਕੱਠਾ ਕਰ ਲੈਨੇ ਆ ਉਹ ਕਹਿੰਦੇ ਚਰਨ ਧੂੜ ਹੈ ਜੀ। ਖੇ ਉੱਧੀ ਅਥੇ। ਅੱਛਾ। ਗੁਰੂ ਗਵੀਰ ਖੇ ਕਹਿੰਦਾ। ਤੁਹਾਡੀ ਵੀ ਐਸਾ ਕੋਈ ਸੰਤ ਹੋਏ। ਤੇ ਵੇਲੇ ਭਗਵਾਨ। ਫਿਰ ਕਹਿੰਦਾ ਰੋੜਾ ਪਿਆ ਤੋ ਕਿਆ ਪਿਆ। ਪੰਥੀ ਕੋ ਦੁੱਖ ਦੇ ਕਹਿੰਦੇ ਢੋਕਲ ਵੱਜੂ। ਅਰਜਨ ਐਸਾ ਚਾਹੀਏ ਜੀ। ਜੋ ਧਰਨੀ ਮੇਰੇ ਖੇ ਉਹ ਰੋੜੇ ਤੋਂ ਜੋ ਬਰੀਕ ਮਿੱਟੀ ਬਣੀ ਹੈ ਉਹਦਾ ਨੂੰ ਗੁਰਬਾਨੀ ਖੇ ਹੈ ਨੇ ਜਾਣ ਕੇ ਉਹਨੂੰ ਧੂੜ ਬਣਾ ਦੇਣਾ ਕੋਈ ਥੀਓ ਵਿਚਾਰਿਆ ਕੋਈ ਹੀ ਨੇ ਕਿ ਜੀ ਮਹੱਲਾ ਪੰਜਵਾਂ ਇਸ ਨੂੰ ਮੰਨ ਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤਿੰਨ ਸੁਖ ਪਾਇਆ ਇਸ ਨੂੰ ਮੰਨ ਵਸਾਏ ਜੇਲੀ ਤੁਪਾਇ ਮਨੁੱਖੀ ਕਿਹਨੂੰ ਬਸਾਉਣਾ ਚਾਹੀਦਾ ਮਨੁੱਖੀ ਤਾਂ ਪਹਿਲਾਂ ਹੀ ਆਹੋ ਧਿਆਨ ਰੱਖਿਆ ਜਿਹਨੇ ਕੀਤਾ ਦੇਖਦੀ ਹੈ ਸੂਰਜ ਨੂੰ ਨਹੀਂ ਦੇਖਦੀ ਉਹ ਮਨ ਵਿੱਚ ਵਸਾ ਕੇ ਰੱਖੋ ਜੀ ਤੋਂ ਮਨ ਪਹਿਲਾਂ ਹੋਇਆ ਉਹਦਾ ਮੂਲ ਹੈ ਜਿਹੜਾ ਆਪਣਾ ਮੂਲ ਨੂੰ ਵਸਾ ਕੇ ਰੱਖੋ ਠੀਕ ਹੈ ਜਿਹਨੂੰ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੈ ਆਪਣਾ ਮੂਲ ਠੀਕ ਹੈ ਜਿਨਿ ਨਹੀਂ ਧਿਆਇਆ ਖਸਮ ਤਿੰਨ ਸੁਖ ਪਾਇਆ ਜਿਹਨੇ ਆਪਣੇ ਮੂਲ ਧੰਤ ਆ ਹੈ ਤੇ ਅੰਧੇ ਕੇ ਉਹਨਾਂ ਸੁਖ ਮਿਲਿਆ ਅਜੇ ਸੁਖੇ ਮਿਲਿਆ ਠੀਕ ਹੈ ਜੇ ਬਾਹਰ ਬਹੁਤ ਕੁਝ ਹੈ ਮੇਰੇ ਨਾਲ ਧਿਆਨ ਬਟਾਉਣ ਨਾਲ ਤਾਂ ਸੁਖੇ ਮਿਲਿਆ ਅਜੇ ਬਹੁਤ ਕੁਝ ਹੈ ਗਾ ਮੇਰੇ ਜਨਮ ਪਰਵਾਨ ਗੁਰਮੁਖੀ ਆਇਆ ਹੁਕਮੇ ਬੂਝ ਨਿਹਾਲ ਖਸਮ ਫਰਮਾਇਆ ਸਫਲ ਜਨਮ ਪਲਵਾਨ ਨੂੰ ਗੁਰੂ ਬਖ਼ਾਯਾ ਕਿਨੇ ਮੂਲ ਦਾ ਵੀ ਧਿਆਨ ਰੱਖ ਲਿਆ ਉਹ ਵੀ ਸਮਝਣੋਂ ਗੁਰੂਸਾਹਿਬ ਦਾ ਸਭਲ ਜਨ ਵੀ ਪਰਣ ਹੋ ਗਿਆ ਉਹਦਾ ਜਨਮ ਪਲਵਾਨ ਹੋ ਗਿਆ ਉਹਨੇ ਵੀ ਸਫਲਤਾ ਪਾ ਲਈ ਆਪਣੇ ਮੂਲ ਦੇ ਵੀ ਧਿਆਨ ਤਾਰਿਆ ਹੋ ਗਿਆ ਜਿਹੜਾ ਮੂਲ ਤੇ ਧਿਆਨ ਲਖਦਾ ਇੱਕ ਹੋ ਜਾਂਦਾ ਉੱਗਣਾ ਹੀ ਵਾਕੀ ਰਹਿ ਗਿਆ ਹੁਣ ਉਹਦਾ 2000 ਸੁੱ ਲੱਗੇ ਮੁਕਤ ਹੋ ਗਿਆ ਹੋ ਉਹ ਮੁਕਤਾ ਜੀ ਦਾ ਆਪਣਾ ਸਫਲਜੰਤ ਪ੍ਰਵਾਨ ਗੁਰੂ ਕੋਲ ਆਇਆ ਹਾਂਜੀ ਉਹ ਮੁਕਤਾ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲਈ ਠੀਕ ਹੈ ਜੀ ਹੁਕਮ ਹੈ ਬੂਝ ਨਿਹਾਲ ਖਸਮ ਫਰਮਾਇਆ ਇਹ ਹੁਕਮ ਬੂਝ ਲਵੇ ਜਿਹੜਾ ਹੁਕਮ ਜਿਹੜਾ ਖਸਮ ਨੇ ਫਰਮਾਇਆ ਪਰਮੇਸ਼ਰ ਨੇ ਫਰਮਾਇਆ ਨਿਹਾਲ ਹੋ ਜਾਂਦਾ ਉਹ ਕਹੋਣਾ ਨਿਹਾਲ ਖਸਮ ਫਰਮਾਇਆ ਇਹ ਤੋਂ ਕੀ ਰਹਿ ਜਾਂਦਾ ਦੋ ਪਦਾਰਥ ਹੋ ਰਹੇ ਅੱਛਾ ਜੀ ਬਿਨਾਂ ਗੱਲਾਂ ਦੇ ਸੁਣਨ ਵਾਲੀ ਬਾਣੀ ਸੁਣ ਗਈ ਹੁਕਮ ਸੁਣ ਗਿਆ ਪੁੱਜ ਗਿਆ ਹਾਂ ਸੁਰਤਿ ਸ਼ਬਦ ਦਾ ਫੇਲ ਹੋ ਗਿਆ ਚਾਰੇ ਪਦਾਰਥ ਕੋ ਪਹਿਲਾਂ ਸੋਖਾ ਫਿਰ ਨਿਹਾਲ ਨਿਹਾਲ ਦੀ ਉਸ ਸੱਚਖੰਡ ਦੀ ਸਾਰੇ ਨਿਹਾਲ ਨੇ ਸਾਜ ਅਸੀਂ ਸੁਖ ਭਾਲਦੇ ਸੁਖ ਤੋਂ ਉਤਲੀ ਅਵਸਥਾ ਨਿਹਾਲ ਹੈ ਅੱਛਾ ਜੀ ਉਹਦੇ ਬਿਹਾਲਾਂ ਨਿਹਾਲ ਠੀਕ ਹੈ ਜਿਸ ਹੋ ਆਪ ਕਿਰਪਾਲ ਸੋ ਨਾਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਸੋ ਨਾ ਫਰਮਾਇਆ ਉਹਨੂੰ ਪਰ ਫਾਇਦਾ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਉਹ ਚਾਹੇ ਸੁਖ ਦਿੱਤਾ ਚਾਹੇ ਦੁੱਖ ਦਿੱਤਾ ਉਹਨੂੰ ਬਿਠਾ ਕਰਕੇ ਹੁੰਦੇ ਚਾਹੇ ਤੱਕੀ ਕਵੀ ਤੇ ਹੀ ਵਿਛਾਲਦਾ ਸਤੂ ਨੇ ਇਹ ਵੀ ਨਹੀਂ ਹਾਲਿਆ ਹੋ ਦੂਰੀਆਂ ਵਾਸਤੇ ਕੁਝ ਹੋਣ ਲੱਗਦਾ ਹੋਊਗਾ ਜੋ ਜੋ ਦਿੱਤਾ ਖਾਦੋਂ ਸੋਈ ਸੁੱਕਾ ਆਇਆ ਆਇਆ ਉਹਨੂੰ ਸੁੱਕ ਕਰਕੇ ਹੀ ਬੰਦੇ ਨੇ ਸਾਰੀ ਉਹ ਵੀ ਸੁੱਕੇ ਆ ਠੀਕ ਹੈ ਜੀ ਨਾਨਕ ਜਿਸੈ ਦਇਾਲ 부ਝਾਏ ਹੁਕਮ ਮਿੱਤ ਜਿਸੈ ਭੁਲਾਏ ਆਪ ਮਰ ਮਰ ਜਮੈ ਨਿਤ ਓਹੋਂ ਬਿੱਤਾ ਸਬਦਾ ਹੁਕਮ ਕਿਸੇ ਦਾ ਵੈਰੀ ਨਹੀਂ ਹੈ ਵੈਰੀ ਹੈ ਸਖਤਾਂ ਜਿਹੜੇ ਤਾਂ ਗੱਲ ਬਕਰਦਨ ਵਾਲੇ ਨੇ ਉਹਨਾਂ ਤੇ ਪ੍ਰਹਾਰ ਕਰ ਦਿੰਦਾ ਹੁਕਮ ਕੋਈ ਗੱਲ ਕੁਛ ਦੀ ਇੱਕ ਲੈਵਲ ਕਰ ਰਿਹਾ ਹੈ ਉਹ ਅਸਲ ਤੇ ਵਿੱਚ ਇੱਕ ਲੈਵਲ ਕਰਨਾ ਚੱਲਦਾ ਜਿਹੜਾ ਉੱਪਰ ਜਾਂਦਾ ਜਿਹੜਾ ਹੰਕਾਰੀ ਉੱਪਰ ਨੂੰ ਜਾਂਦਾ ਆਪੇ ਵੜੇ ਜਾਂਦਾ ਉਹ ਸਾਰੇ ਜਿਹੜਾ ਬਰਾਬਰ ਤੇ ਉੱਪਰ ਜਾਂਦਾ ਖੜਨਾ ਚੱਲ ਜਾਂਦਾ ਵੜਿਆ ਜਾਂਦਾ ਵੱਡਾ ਵਾਂਗ ਜਿਹੜਾ ਉਹ ਵੜਿਆ ਜਾਂਦਾ ਕੋਈ ਰੰਗ ਸਤਖੰਡ ਚ ਕੋਈ ਨਹੀਂ ਨਾ ਵੱਡਾ ਛੋਟਾ ਨਹੀਂ ਹੈ ਛੋਟੇ ਨੂੰ ਵੱਡਾ ਕਰਦਾ ਹੈ ਵੱਡੇ ਵੱਡੇ ਨੂੰ ਵੱਡ ਕੇ ਬਰਾਬਰ ਕਰਦਾ ਵੱਡਿਆਂ ਰੀਸ ਵੱਡਿਆਂ ਦੀ ਰੀਸ ਨਹੀਂ ਕਰਨੀ ਛੋਟਾ ਦਾ ਵੱਡਾ ਹੋ ਚੁ ਕੋਈ ਰੌਲਾ ਵੱਡਾ ਵੱਡ ਕੇ ਛੋਟਾ ਨਾਲ ਪੈਂਦਾ ਹਾਂ ਨਾਨਕ ਜਿਸੈ ਦਇਆਲ 부ਝਾਏ ਹੁਕਮ ਮਿੱਤ ਜਿਸੈ ਪੁਲਾਏ ਆਪ ਮਰ ਮਰ ਜਮਹਿ ਨਿਤ ਨਾ ਕੋਈ ਕਹਦਾ ਤੇ ਧਿਆਲ ਹੋ ਜਵੇ ਉਹਨੂੰ ਹੁਕਮਾਂ ਵਿੱਚ ਲੱਗਦਾ ਹੈ ਬਿੱਤਰ ਹੁਕਮਾਂ ਦੇ ਵਾਸਤੇ ਬਿੱਤਰ ਹੈ ਜਿਹਨੂੰ ਪਰਮਾਤਮਾ ਦੇ ਪਰਮੋਡ ਵਿੱਚ ਡਰ ਜਵੇ ਹੁਕਮ ਦੇ ਵਿੱਚ ਜੰਮਣ ਵਾਲਾ ਹੋਵੇ ਰਹੇ ਜਵੇ ਉਹ ਮਰ ਬਾਰ ਜਪੇ ਬਿੱਤਰ ਹੁਕਮ ਇੱਕੋ ਉਹ ਬਚਾਉਣ ਵਾਲਾ ਵੀ ਹੁਕਮ ਹੈ ਜਿਵੇਂ ਕਹਿੰਦਾ ਹੁਕਮ ਅਨੁਸਾਰ ਚੱਲੀਏ ਉਹਦੇ ਬਚਾਉਣ ਵਾਲਾ ਜਿਹੜਾ ਹੁਕਮ ਦੀ ਖਿਲਾਫਤ ਕਰਦਾ ਉਹਦੇ ਵਧਣ ਵਾਲਾ ਇਕ ਕੋਈ ਅਖੰਡਾ ਹੋਈ ਹੈ ਜਿਹੜਾ ਉੱਪਰ ਉੱਠੂਗਾ ਖੱਤਾ ਦਾ 11 ਤੇ ਚੱਲਦਾ ਨਾ ਇੱਕੋ ਲੈਵਲ ਤੇ ਜੜੀ ਉੱਗਲੀ ਵਾਰ ਚਲੀ ਗਈ ਜੜੀ ਦੇ ਨਾਲ ਤਵਲੀ ਜਣਜੀ ਜੜੀ ਬੰਨਿਆ ਉਗਲੀ ਬੰਲੀ ਬੜੀ ਪਿੱਛੇ ਰੱਖੋ ਜੜੀ ਨੂੰ ਬਾਹਰ ਰੱਖੋ ਔਗਣਾਂ ਰੱਖੀਦਾ ਪਰ ਔਗਣਾਂ ਖਾਨ ਥਕੀਦਾ ਹੱਥ ਦੀ ਥਕੀ ਦੇ ਨਾਲ ਔਗਣ ਵਧਣ ਵਾਲਾ ਹੁਕਮ ਹੈ ਦਾ ਧੋਖਾ ਕਰਨਾ ਕੁਬੇਜੇ ਤੋਂ ਹੱਥਾਂ ਨਾਲ ਵੀ ਗਏ ਤੋਂ ਠੀਕ ਹੈ ਜੀ ਆਣ ਜਾਣ ਇਦਾਂ ਗੱਲ ਇਦਾਂ ਆਪਨ ਨੇ ਆਹ ਗੋਲ ਨੇ ਇੱਥੇ ਸਿਰਦਿਆਂ ਨੇ ਖਾਦ ਬਣ ਜਾਂਦੀਆਂ ਤੇਰੇ ਤੇਰਾ ਫੈਲਾ ਹੋਣ ਲਈ ਉਹਦੇ ਨਾਲੇ ਤਤਕਾਲ ਕਿਨ ਪ੍ਰਭ ਦਾਸ ਦਾ ਦੁੱਖ ਨਾ ਖਵ ਸਕੈ ਔਰ ਜੋਨੀ ਜੁੱਤੇ ਲੈ ਕਿ ਛਿੜਦਾ ਗਏ ਤੇ ਟਗੜੀ ਤੇ ਸੱਤ ਕਾਲ ਮਾਰਤੇ ਬਸ ਹੁਕਮ ਹੋਇਆ ਵਰਗਿਆਂ ਨੂੰ અમારી ਭਈਆਂ ਘਰਦਿਲ ਜਾਂਦੇ ਠੇਢੀ ਰਬ ਦਾਸ ਕਾ ਦੁੱਖ ਨਾ ਖੈਂਚ ਸਕ ਸਭ ਦਾਸਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ ਦਸਾਂ ਨੂੰ ਦੁੱਖ ਦੇਣ ਵਾਲੇ ਨੇ ਜਿਹੜੇ ਉਹਨਾਂ ਨੂੰ ਬਰਦਾਸ਼ਤ ਨਹੀਂ ਆ ਪ੍ਰਭ ਔਰ ਫਲ ਫੜ ਕੇ ਜੋਦੀਆਂ ਜੋਹਣਾ ਚ ਪਾਤਾ ਕੀੜੇ ਬਗੋੜੇ ਬਣਾਸਤੇ ਯੋਧੇ ਸੰਗਾਨਾ ਦਾ ਕਾਜੀ ਲੈਓ ਕਾਜੀ ਉਹ ਬੁਰਕੇ ਨੂੰ ਕਾਜੀ ਹੋ ਗਿਆ ਇਹਨੇ ਬਦਦਰ ਕਾਜੀ ਬਾਗ ਸਦਾ ਹੁੰਦਾ ਨਾ ਉਹ ਕਹਾਂ ਮੈਂ ਜਲੋਂ ਘਰ ਤੇ ਰਹੇ ਗਤੀ ਗਰੀ ਇਹ ਦੀ ਗਲਤੀ ਹੋ ਗਈ ਇਹਦੇ ਤੇ ਨੂੰ ਕੀ ਕਹਿੰਦੇ ਅੱਛਾ ਜੀ ਕਿਆ ਲਤਾ ਕੀ ਕਹੇ ਜੀ ਮੱਥੇ ਵਾਲ ਪਛਾੜੇਨ ਜਮ ਮਾਰਗ ਮੁੱਤੇ ਮੱਤੇ ਦੇ ਬਾੜ ਤੇ ਉਹ ਪਿਛਾੜ ਤੇ ਪਿਛਾਣੂ ਕਰਤੇ ਦੇਖੋ ਕਬੀਰ ਕਹਿੰਦਾ ਵਨ ਬੁੱਢਿਓ ਨਹੀਂ ਇਹਨੂੰ ਸਮਝ ਲੋ ਮਥੇ ਦੇ ਬਾੜ ਕੀ ਹੁੰਦੇ ਨੇ ਇਹ ਸਮਝਣ ਵਾਲਾ ਵਿਸ਼ਾ ਸੀ ਕਬੀਰ ਕਹਿੰਦਾ ਵਨ ਬੁੱਢਿਆ ਜੋ ਸੋਚ ਨਿਕਲਦੀ ਆ ਉਹ ਬਾੜ ਨੇ ਚਲ ਬਹੁਤ ਚਰਿਆ ਜੇ ਤਾਂ ਹੋ ਜਾਣਾ ਪਿਛਲੇ ਪਾਸੇ ਨੂੰ ਪਿਛਵਾਲੂਆਂ ਦੇ ਬਾੜ ਫਿਰ ਤਾਂ ਪੁੱਠਾ ਚੱਲ ਗਿਆ ਮਾਇਆ ਵਾਲੂ ਚੱਲ ਗਈ ਜੇ ਆਏ ਮੂਰੇ ਨੂੰ ਅੱਛਦੇ ਰੱਖੇ ਜੂੜਾ ਸਰੇ ਤੇ ਨੂੰ ਫਿਰ ਸੱਚ ਕਰਨ ਵਾਲੂ ਨੇ ਜਿਹੜੇ ਸਿੱਖ ਨੇ ਮੂਰੇ ਨੂੰ ਕੇਵਲਦੇ ਨੇ ਪਿਛੇ ਨੂੰ ਕਰੇ ਹੋਏ ਨੇ ਬੱਥੇ ਦੇ ਆਏ ਕੀਤੇ ਨੇ ਪਿਛੇ ਨੂੰ ਠੀਕ ਹੈ ਜੀ ਗੁੱਤ ਪਿਛੇ ਕੀਤੀ ਹੋਈ ਹੈ ਉਹ ਗਿੱਚੀ ਪਿਛੇ ਮੱਤ ਤਾਂ ਹੀ ਕਹਿੰਦੇ ਸੀ ਇਹਦੀ ਗਿੱਚੀ ਪਿਛੇ ਮੱਤ ਹੁੰਦੀ ਹੈ ਬਾਹਰ ਜੋ ਗਿੱਚੀ ਪਿਛੇ ਜੂੜਾ ਜੋ ਗਿੱਚੀ ਪਿਛੇ ਇਹ ਬੜੀਆਂ ਗੱਲਾਂ ਬੜੀਆਂ ਬੜੀਆਂ ਗੁਰਬਾਣੀ ਜਿਹੀਆਂ ਨੇ ਇਹ ਗੱਲਾਂ ਅੱਛਾ ਜੀ ਗੁਰਬਾਣੀ ਦੇ ਸਬੂਤ ਪੈ ਰਹੇ ਨੇ ਠੀਕ ਹੈ ਜੀ ਦੁੱਖ ਲੱਗੇ ਬਿਲ ਲਾਏਣਾ ਬਿਲ ਲਉਦੇ ਨੇ ਚੀਕਾਂ ਮਾਰਦੇ ਜਿਹਨੂੰ ਦੁੱਖ ਲੱਗਦਾ ਤੇ ਚੀਕਾਂ ਮਾਰਦੀ ਹੈ ਉਹਨੂੰ ਘੋਲ ਸੁੱਤੇ ਕੋਲ ਨਰਕ ਦੇ ਵੀ ਸੁੱਤੇ ਪਏ ਚੀਕਾਂ ਮਾਰਦੇ ਨੇ ਹਾਂ ਕਰਕੇ ਸੁੱਤੇ ਨੇ ਠੀਕ ਹੈ ਜੀ ਦੁੱਖ ਲੱਗੇ ਬਿਲ ਲਾਏਣਾ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਐ ਨਾਨਕ ਹਰ ਸੱਤੇ ਨਰਕ ਘੋਰ ਸੁੱਤੇ ਲਫ ਨੀ ਲਾਇ ਹੈ ਨਰਕ ਘੋਰ ਸੁੱਤੇ ਲਫ ਹੈ ਕੈਂ ਕਹਿਤੇ ਚਾਹੀਦਾ ਅੱਛਾ ਜੀ ਲਈ ਸੁੱਤੇ ਵੇ ਬਿਲ ਨਰਕ ਘੋਰ ਸੁੱਤੇ ਸੁੱਤੇ ਟੈਂਕਾ ਚਾਹੀਦਾ ਅੱਛਾ ਦਿੱਤੇ ਗਏ ਹਾਂ ਤਾਂ ਬਿਲ ਲਾਉਣਗੇ ਸੁੱਤੇ ਪੈ ਗੀਬਿਲ ਕੀ ਨੂੰ ਸੌਂ ਗਿਆ ਉਹ ਤਾਂ ਬੜਿਆ ਆਏ ਠੀਕ ਹੈ ਜੀ ਦੁੱਖ ਲੱਗੇ ਬਿੱਲ ਲਾਣੀਆਂ ਨਰਕ ਘੋਰ ਸੁੱਤੇ ਜੀ ਹੋਰ ਨਰਕ ਵਿੱਚ ਸੁੱਤੇ ਨਾਨਕ ਹਰ ਸੱਤੇ ਜਿਹੜੇ ਉਹਦੇ ਦਾਸ ਤੇ ਉਹਨਾਂ ਦੇ ਕੰਠ ਲਾਤਾ ਨਾਮ ਉਹ ਬੋਲਦੇ ਨੇ ਸੱਚ ਬੋਲਦੇ ਨੇ ਗੁਣ ਗਾਇਨ ਕਰਦੇ ਨੇ ਕੰਠ ਦਾਸ ਰੱਖਿਆ ਨਾਨਕ ਹਰ ਹੇ ਸੱਤ ਲਾਤਾ ਸੱਚ ਲਾਤਾ ਉਹਨਾਂ ਦੇ ਅੰਦਰੋਂ ਸੱਚ ਲਾਤਾ ਸੱਚ ਦਾ ਲੈਫ ਕਰਤਾ ਉਹਨਾਂ ਦੇ ਅੰਦਰੋਂ ਸੱਚ ਨਿਕਲਦਾ ਠੀਕ ਹੈ ਜੀ ਆ ਸੱਚ ਬੋਲਦੇ ਨੇ ਦੋਏ ਬਿੱਲ ਲਾਉਂਦੇ ਨੇ ਜਿਹੜੇ ਝੂਠ ਬੋਲਦੇ ਨੇ ਨਾ ਸੱਚ ਨੂੰ ਝੂਠ ਸਾਬਤ ਕਰਨਾ ਜਿਹੜੇ ਕੱਲ ਕੱਲ ਸੀ ਉਹ ਬਿੱਲ ਲਾਉਂਦੇ ਤੇ ਕੱਲ ਵਾਲੇ ਲੈਖ ਵਾਲੇ ਉਹ ਪਰੇਸ਼ਾਨ ਹੋ ਗਏ ਇਸ ਗੱਲ ਤੇ ਜਿ ਸਾਜ਼ੂਦੋਂ ਇਹ ਮੰਗਦਾ ਉਹ ਵੀ ਮੰਗਦਾ ਦਸਮਾਨ ਨੂੰ ਉਹ ਬੜੇ ਬਿੱਲ ਲਾਇਏ ਨੇ ਬਹੁਤ ਕੁਝ ਲਿਖਿਆ ਬਿੱਲ ਲਾਇਏ ਨੇ ਹੋਰ ਕੁਝ ਨਹੀਂ ਪੱਲੇ ਪੱਲੇ ਕੁਝ ਨਹੀਂ ਉਹਨਾਂ ਦੇ ਸਾਬਤ ਨਹੀਂ ਕਰ ਸਕੇ ਉਹ ਸਾਬਤ ਨਾ ਕਰ ਸਕਣ